ਦਲੋ ਕਮਹੱਲਾ ਤੀਜਾ 바 비ਹਾ ਇਹ ਜਗਤ ਹੈ ਮਤ ਕੋ ਭਰਮ है ਇਹ 바 비ਹਾ ਪਸ਼ੂ ਹੈ ਇਸ ਨੂੰ ਬੂਝਣ ਨਾ ਹੀ ਪਦਿਆ ਇਹੋ ਜਗਤ ਹੈ ਵਿਹਿਆ ਇਹ ਸਾਰਾ ਜੰਤ ਹੈ ਮਤ ਕੋ ਭਰਮ ਉਹ ਅਸੀਂ ਪਬੀ ਨੂੰ ਬਾਬੀ ਜਾਨੀ ਕਹਿ ਰਹੇ ਸਾਰਾ ਜਗ ਤੇ ਬਬੀ ਹੈ ਜਿਉਂਨਾ ਦੇ ਜਗ ਦੀਆਂ ਜੀਵ ਹੈ ਜਿੱਥੇ ਬਬੀ ਹੈ ਸਾਰੇ ਇਹ ਵੀ ਬਬੀ ਦਾ ਪਸ਼ੂ ਹੈ ਜਿਹੜਾ ਇਹ ਬਬੀ ਹੈ ਜਿਹਦੀ ਅਸੀਂ ਗੱਲ ਕਰਦੇ ਜਿਹਨੂੰ ਅਸੀਂ ਉਹਦੇ ਇੱਥੇ ਰਹਿਣ ਗੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁ ਇੱਥੇ ਬਿੰਦੀ ਲਾਈ ਹੋਈ ਇਹ ਬਾਬੀਂ ਹਾਂ ਇਹ ਗਲਤ ਹੈ ਜੀ ਪੀ ਇਹ ਪਹਿਲੇ ਤੇ ਨਹੀਂ ਅੰਮ੍ਰਿਤ ਹਰ ਕਾ ਨਾਮ ਹੈ ਜਿਤ ਪੀਤਾ ਤਿਖ ਜਾਏ ਨਾਨਕ ਗੁਰਮੁਖੀ ਜਿਨੀ ਪੀਆ ਤਿੰ ਬੋੜ ਲਾਗੀ ਆਏ ਗੁਰਦਾਰ ਦਾ ਨਾਮ ਹੈ ਹਰ ਕਾ ਰੂਪ ਅੰਮ੍ਰਿਤ ਹੈ ਜਿਤ ਪੀਤੇ ਜਿਹਦੇ ਪੀਣ ਨਾਲ ਚਲੀ ਜਾਣੀ ਪਿਆਸ ਚਲੀ ਜਾਣੀ ਤਉਬਦ ਤਿਕ ਰਹਿਣੀ ਆਂ ਦੀ ਇਹ ਹਰ ਕਾ ਨਾਮ ਉਪਰਤ ਪੀ ਮਾਇਆ ਦੀ ਤਿਖ ਹੈ ਜੀ ਮਾਇਆ ਦੀ ਤਿਖ ਸਰੀਰ ਨੂੰ ਤਾਂ ਤਿਖ ਲੱਗੂਗੀ ਮਾਇਆ ਦੀ ਤਿਖ ਮਿਟ ਜੂ ਹੈ ਆਤਮਾ ਦੀ ਤਿਖ ਦੀ ਜੋ ਰਹਿਣੀ ਠੀਕ ਹੈ ਨਾਨਕ ਗੁਰਮੁਖੀ ਜਿਨੀ ਪੀਆ ਤਿੰ ਬੌੜ ਨਾਲ ਲੱਗੀ ਆਏ ਜਿਹਨਾਂ ਗੁਰਮੁਖਾਂ ਨੇ ਪੀ ਲਿਆ ਜਦ ਬੌੜ ਨਾਲ ਲੱਗੀ ਆਏ ਉਹਨਾਂ ਦੁਆਰਾ ਸੈ ਲੱਗੀ ਹੋਈ ਇਹ ਦਾ ਆਧਾਰ ਤੇ ਕਹਿ ਰਹੇ ਆ ਸੀ ਕਿਉਂਕਿ ਕਿਸੇ ਨੂੰ ਐਸੇ ਲੱਗੀ ਨਹੀਂ ਦੁਬਾਰਾ ਤਾਂ ਕਹਿ ਰਹੇ ਆ ਵੀ ਤੇ ਲੱਗਦੀ ਹਾਂਜੀ ਮਹੱਲਾ ਤੀਜਾ ਮਲਾਰ ਸੀਤਲ ਰਾਗ ਹੈ ਹਰ ਧਿਆਈਏ ਸ਼ਾਂਤ ਹੋਈ ਹਰ ਜੀਓ ਆਪਣੀ ਕਿਰਪਾ ਕਰੇ ਤਾਂ ਵਰਤੈ ਸਭ ਲੋਈ ਮਲਹਾਰ ਸੀਤਲ ਰਾਗ ਹੈ ਮਲਹਾਰ ਦੇ ਵਿੱਚ ਆ ਕੇ ਜਦੋਂ ਮਾਹ ਮੈਲ ਲੈ ਜਾਂਦੀ ਏ ਮੰਦੀ ਛੱਡਾ ਹੋ ਜਾਂਦਾ ਸ਼ਾਂਤੀ ਆ ਜਾਂਦੀ। ਫਿਰ ਆਗ ਇਹੜਾ ਹੈ ਸ਼ੀਤਲ ਹੋ ਜਾਂਦਾ ਫਿਰ। ਉਹਦੀਆਂ ਬੰਬਾਂ ਜਿਹੜੀਆਂ ਨੇ ਐਸੀਆਂ ਰਹਦੀਆਂ ਨੇ ਅੱਗ ਨਹੀਂ ਬਕਦਾ ਸਿਰਫ। ਵਾਇਆ ਕਰਨ ਜਦ ਇੱਕੋ ਜਈ ਅੱਗ ਨਹੀਂ ਖਾਂਦਾ ਫਿਰ ਉਹ। ਵਾਇਆ ਕਰਨ ਸ਼ੀਤਲ ਆ ਜਾਂਦਾ। ਤੇ ਕੋਈ ਉਹਦੀ ਡਿਮਾਂਡ ਵੀ ਆ ਨਾਮ ਦੀ ਡਿਮਾਂਡ ਹੈ। ਤੇ ਭੁੱਖਾ ਨਾ ਸੱਚੇ ਨਾਮ ਦੀ ਭੁੱਖ ਲੱਗੀ ਹੋਈ ਹੈ ਸ਼ੀਤਲ ਲਾਗ ਦੇ ਵਿੱਚ। ਤੇ ਆਈ ਹੈ ਦੇ ਵਿੱਚ ਹੈ ਸ਼ਾਂਤੀ ਹੋਏ। ਸ਼ਾਂਤੀ ਹੋਈ ਹੋਈ ਹੈ। ਹਰ ਜਿ ਧਿਆਨ ਰਹਿਣਾ ਚਾਹੀਦਾ। ਮਾਇਆ ਜਿ ਧਿਆਨ ਨਹੀਂ ਕਰਨ ਦਾ ਮਤਲਬ ਹੈ ਤਿਰਕੁੜੀ ਧਿਆਨ ਨਹੀਂ ਕਰਨ ਦਾ ਮਤਲਬ ਹੈ ਮਾਇਆ ਦੀ ਭੁਖ ਦੀ ਇਹ ਕਹਿਣ ਦਾ ਮਤਲਬ ਹੈ। ਇਹ ਮਲਹਾਰ ਹੈ ਜੀ ਸ਼ਬਦ ਮਲਹਾਰ ਹੈ। ਮਲਹਾਰ ਹੈ ਲਫ਼ਜ਼ ਹੋ ਪੜਦਾ ਜੀ ਨਾ। ਹਾਹਾ ਪੈਰ ਚੋਂ ਡਾਂਟਾ ਹੁੰਦਾ ਉਹਦੇ ਨੂੰ ਅੱਛਾ ਜੀ। ਹੋ ਸਕਦਾ ਦੇਸੀ ਸ਼ਬਦ ਹੋਵੇ ਮਲਹਾਰ ਵਾਸਤੇ। ਚਲੋ ਕੁਝ ਵੀ ਹੈ ਆਪਾਂ ਇਹਦੇ ਅਰਥ ਮਾਲ ਕਰਾਂਗੇ। ਅਰਥ ਕਰਾਂਗੇ। ਅਛਾ ਜੀ ਰਾਗ ਦਾ ਭਾਵ ਗਿਆਨ ਹੁੰਦਾ ਜੀ ਰਾਗ ਦਾ ਭਾਵ ਹੈ ਡਿਮਾਂਡ ਇੱਛਾ ਬੋਲਣ ਜੋ ਬੋਲਦਾ ਉਹ ਇਹ ਦੀ ਇੱਛਾ ਬੋਲਦਾ ਨਾ ਬੋਲਣ ਵੇਲੇ ਇਹ ਪ੍ਰਗਟ ਹੁੰਦੀ ਆ ਰਾਗ ਸਮਝ ਪੈ ਜੂਗੀ ਸ਼ੀਤਲਤਾ ਵਾਸਤੇ ਹੀ ਡਿਮਾਂਡ ਕਰੂਗਾ ਹਾਂ ਰਾਗੇ ਸ਼ੀਤਲ ਉਹ ਦੀ ਮਾਨਸਿਕ ਸ਼ੀਤਲਤਾ ਵਾਸਤੇ ਹਰ ਜੀਓ ਆਪਣੀ ਕਿਰਪਾ ਕਰੇ ਤਾਂ ਵਰਤੈ ਸਭ ਲੋਕ ਹਰ ਜੀ ਉਹ ਤੇ ਆਪਣੀ ਕਿਰਪਾ ਕੀਤੀ ਹੋਈ ਹੈ ਤਾਂ ਵਰਤੈ ਸਭ ਲੋਏ ਸਾਗੇ ਲੋਏ ਪੂਰੀ ਰੋਸ਼ਨੀ ਵਰਤਣੀ ਹੈ ਅੰਦਰ ਉਹਦੇ ਪੂਰੀ ਪੂਰਾ ਚਾਨਣ ਹੈ ਉਹਦੇ ਅੰਦਰ ਹਰ ਨੇ ਪੂਰੀ ਰੋਸ਼ਨੀ ਦੇਤੀ ਉਹਦੇ ਦਿੱਤਾ ਇਸ ਕਰਕੇ ਨਹੀਂ ਬੁਝਦਾ ਉਹ ਪਤਾ ਸਗਲ ਦੇ ਬੁਝਣ ਨਾਲ ਫੇਰ ਹੋਈ ਸੱਚ ਦੇ ਲਈ ਕੁਸਮੜੇ ਜਲ ਜਾਂਦੀ ਢੋਲਾ ਹੁਣ ਜੂਗਾ ਕਿ ਹੁਣ ਸਾਰਾ ਆਮ ਆਇਆ ਤੇ ਜਲੇ ਬਿਲਕੁਲੀ ਸੁਬੜਾ ਇਹ ਤੇ ਉਥੇ ਮਾਇਆ ਉਥੇ ਜਾਂਦਾ ਹੋ। ਉਥੇ ਕਰੋਧ ਹੈ ਉਥੇ ਮੋਹ ਹੈ ਸਭ ਕੁਝ ਉਮਾਇਲ ਜੋੜ ਜੀਆ ਜੁਗਤ ਹੋਏ ਧਰਨੀ ਨੋ ਹੋਏ। ਨਾਨਕ ਇਹ ਜਗਤ ਸਭ ਜਲ ਹੈ। ਜਲ ਹੀ ਤੇ ਸਭ ਕੋਈ। ਉੱਥੇ ਜੀਆ ਜੀਆ ਉੱਥੇ ਜਾਂ ਵਾਰਿਸ਼ ਪੈਂਦੀ ਹੈ ਨਾ। ਜੁਗਤ ਹੋਏ ਉਹਨੂੰ ਜੁਗਤੀ ਸੁਭ ਚਾਉਂਦੀ ਹੈ। ਹੈ। ਮੈਂ ਸ਼ਾਂਤੀ ਮੈਨੂੰ ਕਿੱਥੇ ਮਿਲੂਗੀ? ਸ਼ਾਂਤੀ ਕਿੱਥੇ ਮਿਲੂਗੀ ਵਾਇਆ ਅਰਨ ਸਾਗਰ ਦੇ ਵਿੱਚ ਰਹੂੰਗਾ ਤੋਕ ਨਹੀਂ ਹੈ ਸਾਗਰ ਦੇ ਵਿੱਚ ਕੇ ਤੇ ਸੁਖ ਮਿਲੂਗਾ ਹੋਏ ਬੁੱਧੀ ਦਾ ਸਿਹਾਰ ਹੋ ਜਾਂਦਾ ਬੁੱਧ ਬਦਲ ਜਾਂਦੀ ਹੈ ਉਹ ਸਲਖੜੀ ਹੋ ਜਾਂਦੀ ਹੈ ਪਹਿਲੇ ਰੂਪ ਗੁਜਾਰ ਕੋ ਸੋਰੇ ਤੇ ਇਹ ਆਪ ਕੀ ਸੁੰਦਰ ਸਰੂਪ ਸੁਲਖਣੀ ਉਹਦਾ ਤੇ ਰੂਪਵੰਤੀ ਹੋਵੇ ਸੋਭਾਵੰਤੀ ਹੋਵੇ ਉਹਦਾ ਰੂਪ ਚ 당 ਹੁੰਦਾ ਛਗਲ ਕੋਣ ਨਾਲ ਹਾਰ ਜਗਤ ਸਭ ਜਲ ਹੈ ਜਲ ਹੀ ਤੇ ਸਭ ਕੋਈ ਸਾਰਾ ਸੰਸਾਰ ਵੀ ਜਲ ਰੂਪ ਹੀ ਤੇ ਸਭ ਹੋਏ ਪਾਣੀ ਤੇ ਸਭ ਕੁਝ ਪੈਦਾ ਹੋਇਆ ਉਹ ਪਾਣੀ ਹੋ ਰਿਹਾ ਇਹ ਪਾਣੀ ਹੋ ਉਹ ਰੰਗ ਕਿ ਮਾਇਆ ਦਾ ਇਹ ਤੇ ਤੇ ਚੱਲ ਹੋਏ ਇਹ ਉਹ ਹੈ ਅੱਛਾ ਇੱਥੇ ਇਹਦੀੋ ਗੱਲ ਹੋ ਰਹੀ ਹੈ ਜੀ ਸਾਰੇ ਆ ਜਿਹੜਾ ਪਾਣੀ ਹੈ ਠੀਕ ਹੈ ਇਹਨੇ ਮੈਂ ਪਾਣੀ ਜੀ ਨਾਨਕ ਇਹ ਜਗਤ ਸਭ ਜਲ ਹੈ ਜਲ ਹੀ ਤੇ ਸਭ ਕੋਏ ਗੁਰਪ੍ਰਸਾਦੀ ਕੋ ਵਿਰਲਾ ਸੋ ਜਨਮ ਮੁਕਤ ਸਦਾ ਹੋਈ ਕਿਰਪਾ ਦੀ ਕਿਰਪਾ ਨਾਲ ਕਿਸੇ ਬੰਦੇ ਪੈਣੀ ਸੋ ਜਨ ਮੁਕਤ ਆ ਮੁਕਤ 사ਦਾ ਹੋਇਆ 사ਦਾ ਲਈ ਮੁਕਤ ਹੋ ਜਾਂਦਾ ਫਿਰ ਜਿਹਨੂੰ ਸਮਝ ਆ ਜਾਂਦੀ ਆਮ ਮੁਕਤ ਸ਼ਬਦ ਸਿਹਾਰੀ ਨਾਲ ਆਉਂਦਾ ਹੈ ਨਾ ਜੀ ਹਾਂ ਜੀ ਇੱਥੇ ਔਂਕੜ ਨਾਲ ਆਇਆ ਹੋਇਆ ਉਹ ਮੁਕਤ ਉਹ ਮੁਕਤੀ ਠੀਕ ਹੈ ਜੀ ਸੇ ਮੁਕਤ ਸੇ ਮੁਕਤ ਪਏ ਜਨ ਜੀ ਇਹ ਵੀ ਉਹੀ ਗੱਲ ਹੈ ਹਾਂ ਸੱਚਾ ਵੇ ਪਰਵਾਹ ਤਿੱਕੋ ਤੂੰ ਧਣੀ ਤੂੰ ਸਭ ਕੁਝ ਆਪੇ ਆਪ ਦੂਜੇ ਕਿਸ ਗਣੀ ਚਾਬੇ ਪਰਦਾ ਇੱਕੋ ਤੂੰ ਤਲੀ ਕੋਈ ਕੋਈ ਆ ਤੇਰੇ ਕੋਲ ਮਿਹਰ ਜੀ ਨੂੰ ਮਿਲਿਆ ਤੇ ਪਰਵਾਰ ਨੇ ਸੱਚਾ ਪੇਪਰ ਬਾ ਇੱਕੋ ਤੂੰ ਤਲੀ ਪੇਪਰ ਬਾ ਕਹਿੰਦਾ ਲਾਬਰਵਾਜੀ ਹੈ ਪੇਪਰ ਬਾ ਚੀਜ਼ਾਂ ਪੈਦਾ ਕਰਦਾ ਉਹਦੀਆਂ ਸਾਰੀਆਂ ਖਾਂਦੇ ਸਾਲੀ ਜੀ ਕੋ ਖਰਾਬ ਵੀ ਹੋ ਜਾਂਦੀ ਉਹ ਕਹਿੰਦਾ ਕੋਈ ਪਰਵਾਹ ਨਹੀਂ ਪਰ ਤੂੰ ਦੇ ਦੋ ਖਰਾਬ ਹੋ ਜੂ ਕਦਣੀ ਜਾਂਦੀ ਜੇ ਕੋਈ ਨੁਕਸਾਨ ਕਰਦਾ ਜਾਂ ਕੇ ਵੀ ਕਰ ਦਿੰਦਾ ਤਾਂ ਵੀ ਉਹ ਕੋਈ ਉਹ ਕਰਾਉਂਦਾ ਤੋ ਹੀ ਹੈ ਉਹ ਕਹਿੰਦਾ ਜਿਉਂ ਕਰਾਇਆ ਕਿ ਸੰਦੇ ਜਿਹਨੇ ਨਹੀਂ ਕੀਤਾ ਬੇפרਵਾਹ ਕੁਸਾ ਤੂੰ ਸਭ ਕੁਝ ਜੇ ਆਪੇ ਆਪ ਦੂਜਾ ਆਪੇ ਆਪ ਸਭ ਕੁਝ ਹੈ ਉਹ ਜੀ ਦੇ ਵਿੱਚ ਵੀ ਉਹੀ ਆ ਜੇ ਇੱਕ ਹੋ ਗਿਆ ਸਭ ਕੁਝ ਆਪੇ ਆਪ ਇੱਕੋ ਜੱਗ ਹੈ ਤਾਂ ਇੱਕ ਇੱਕੋ ਦੂਨਲੀਆ ਹੋ ਗਿਆ ਫਿਰ ਦੂਨ ਤਨੀ ਹੈ ਤੋ ਹੀ ਆਪੇ ਆਪ ਸਭ ਕੁਝ ਮਾਨਸ ਕੂੜਾ ਗਰਬ ਸੱਚੀ ਤੁਧ ਆਵਾ ਗਾਉਣ ਰਚਾਏ ਤੂੰ ਮੇਦਨੀ ਮਾਨਸ ਕੂੜਾ ਮਾਨਸ ਜਿਆਦਾ ਜਾਦਾ ਹੈ ਮਾਨਸ ਆਦਾ ਹੈ ਜਿਹੜਾ ਜੁੜਿਆ ਕੂੜਾ ਝੁਟਾ ਹੈ ਉਹ ਕੂੜਾ ਜੁੜਿਆ ਹੈ ਮਾਇਆ ਨਾਲ ਜੁੜਿਆ ਹੈ ਕਰਭ ਹੰਕਾਰ ਵੀ ਹੈ ਉਤਾਰੇ ਵੀ ਹੈ ਸੱਚੀ ਤੁਧ ਤੇਰੀ ਜਿਹੜੀ ਬਣੀ ਹੈ ਰ ਤੂੰ ਅੰਦਰ ਅੰਦਰ ਆਂਦਾ ਜਿਹੜਾ ਸਾਨ ਹੈ ਉਹ ਸੱਚ ਘਰ ਦਾ ਝੂਠਾ ਅੱਬਾ ਝੂਠਾ ਜੁੜਿਆ ਦਾ ਸੱਚ ਬੁਲੀ ਤੂੰ ਜਿਹੜਾ ਹੈਗਾ ਤੂੰ ਸੱਚ ਬੁਲੀ ਸੱਚੀ ਬੁਲੀ ਅਸਾਂ ਮਣੀ ਹੁੰਦੀ ਹੈ ਜੀ ਇੱਕ ਤਾਂ ਜਿਹੜੀ ਸੱਪ ਦੇ ਹੁੰਦੀ ਉਹ ਵੀ ਮਣੀ ਹੁੰਦੀ ਆ ਉਹ ਵੀ ਹੁੰਦੀ ਹੈ ਬੜੀ ਹੋਰਦੀ ਹੈ ਨਾ ਜਿਹੜੀ ਹੈ ਲਾਲ ਦਾ ਹਿੱਟਾ ਠੀਕ ਹੈ ਚਿੱਤ ਨੂੰ ਕਿਹਾ ਹੈ ਜੀ ਹਾਂ ਜੀ ਠੀਕ ਹੈ ਜੀ ਆਵਾ ਗੌਣ ਰਚਾਏ ਉਪਾਈ ਮੇਦਨੀ ਆਵਾਗੋਂ ਚਾਇਆ ਵਾਹੀ ਮੇਰੇ ਦਿਨ ਤਸਵੀਰ ਵੀ ਪੈਦਾ ਕੀਤੀ ਆਵਾਗੋਂ ਵੀ ਪੈਦਾ ਸੇਵੇ ਆਪਣਾ ਆਇਆ ਤਿਸ ਗਣੀ ਜੇ ਹਉਮੈ ਵਿੱਚੋਂ ਜਾਏ ਤਾਂ ਕੇਹੀ ਗਣਤ ਗਣੀ ਸਤਗੁਰ ਜਿਹਨੇ ਆਪਣੇ ਸਤਗੁਰ ਦੀ ਸੇਵਾ ਕੀਤੀ ਹੈ ਸਾਰੀ ਜ਼ਿੰਦਗੀ ਉਹਦਾ ਆਇਆ ਹੀ ਸਮਝੋ ਸਕਾਰਥਾ ਸੰਸਾਰ ਚ ਕੋਈ ਗੜਿਆ ਜਾਣਾ ਆਇਆ ਉਹ ਹੀ ਲਿਖਿਆ ਜਾਣਾ ਆਇਆ ਸੀ ਫਲੱਡ ਦੋਇਆ ਉਹਨੇ ਕੋਈ ਲਿਖਦਾ ਕੋਈ ਮੁਕਤ ਹੋ ਜਾਣੀ ਹੈ ਫਾਈਨਲ ਜੱਜਦਾਰ ਦਾ ਉੱਤੇ ਬਾ ਜਲਬ ਨਹੀਂ ਹੋ ਉਹ ਆਟ ਉਹ ਕੱਢ ਦੜ ਆਇਆ ਜਿਸੀ ਗੜੀ ਆਇਆ ਉਹਦਾ ਹੀ ਗੜਿਆ ਜਾਣਾ ਹਾਂਜੀ ਜਾਏ ਤਾਂ ਕਿ ਉਹਦੀ ਕਾਹਦੀ ਗੜਤੀ ਹੈ ਹੋਰ ਉਹ ਕਹਿੰਦੇ ਉਹਦਾ ਲੇਖਾ ਨਹੀਂ ਬਗੜੋ ਸਤਾ ਅੱਜ ਦਿਨ ਉਹਦੀ ਗੜਤੀ ਰਹਿਣੀ ਲੇਖਾ ਬੜੀ ਬਗੜੂ ਤੱਕ ਸਭ ਸਾਧਨ ਜ਼ਾਰੀ ਹੋ ਵਸੇ ਹੈ। ਹੋ ਵਿੱਚ ਆਇਆ ਹੋ ਵਿੱਚ ਗਿਆ। ਰੋਗ ਚ ਘਟਿਆ ਹੋ ਵਿੱਚ ਗਿਆ, ਉਹ ਵੀ ਦਿੱਤਾ ਹੋ ਵਿੱਚ ਲਿਆ। ਇਸੇ ਸਾਲ ਦਾ। ਹੋ ਮਨਮੁਖ ਮੋਹ ਗੁਬਾਰ ਜਿਉਂ ਭੁੱਲਾ ਮੰਝ ਬਣੀ। ਪਾਪ ਸੰਖ ਨਾਵੇਂ ਇੱਕ ਕਣੀ। ਮਨਮੁਖ ਬਹੁਦੇ ਵਿੱਚ ਹੋਇਆ ਹੁੰਦਾ ਗੁਬਾਰ ਅੰਧੇਰਾ ਹੋਇਆ ਹੁੰਦਾ। ਉਹ ਕਰਕੇ ਉਹਦੇ ਅੰਦਰ ਅਗਿਆਨਤਾ ਦਾ ਹਨੇਰਾ ਗੁਬਾਰ ਹੋਇਆ ਹੁੰਦਾ। ਜੋ ਪੂਲਾ ਵਿੱਚ ਬੜੀ ਮਚ ਬਣੀ ਜਿਵੇਂ ਕੋਈ ਜੰਮੜੇ ਪੂਲਾ ਜਾਂਦਾ ਰਾਹ ਦਾ ਪਤਾ ਹੀ ਲੱਗਦਾ ਕਿੱਧਰ ਜਾਣਾ ਕਿੱਧਰ ਨਹੀਂ ਜਾਣ ਲਿਓ ਹੈ ਕੋਈ ਮੁਖ ਜਿਹੜਾ ਉਹਦੇ ਵਿੱਚ ਜਿਹੜਾ ਦੁਬਿਆ ਮੁਖ ਹੋਇਆ ਹੋਇਆ ਹੀ ਹੁੰਦਾ ਜਿਵੇਂ ਕੋਈ ਜੰਗੜੇ ਫਾਸੇ ਪੇ ਪਤਾ ਹੀ ਨਹੀਂ ਹੋਵੇ ਕਿੰਦਰ ਜਾਣਾ ਕੱਟੇ ਪਾਪ ਅਸੰਖ ਅਸੰਖ ਪਾਪ ਕੱਢ ਦਿੰਦੀ ਹੈ ਦੋਵੇਂ ਇੱਕ ਘੜੀ ਦੋਵੇਂ ਇੱਕ ਘੜੀ ਅਸੰਖ ਪਾਪ ਕੱਢ ਦਿੰਦੀ ਹੈ ਕਿੜਕਾ ਇੱਕ ਜੀਬ ਸਾਵਾ ਤਾਂ ਕਿ ਦੋਵੇਂ ਕੰਢੀ ਜੇ ਗਿਲ ਕਾਰ ਦਾ ਹੋਵੇ ਕੜੀ ਹੋਵੇ ਅਸੰਤ ਪਾਪ ਕੱਟ ਦਿੰਦੀ ਹੈ ਠੀਕ ਹੈ ਜੀ ਇੱਥੇ 11ਵੀਂ ਪੜੀ ਸਮਾਪਤੀ ਹੈ ਜੀ